ਤੂੰ ਕਿਉਂ ਵਿਸਰੈ ਜੇ ਘਾਲਣਾ ਭੰਨਾ ਹੈ ਤੂੰ ਕਿਉਂ ਵਿਸਰੈ ਜੇ ਕੀਆ ਜਾਣਾ ਹੁਣ ਜਦ ਸਮਾ ਗਿਆ ਇੱਥੇ ਵਿਸਲਦਾ ਆ ਗਿਆ ਜੁੜਦਾ ਗਿਆ ਲੋ ਹੁਣ ਖਤਰਾ ਵਿਸਲਦਾ ਹੈ ਜੇ ਹਰ ਵਿਸਲ ਜੂਫੇ ਘੜੀ ਸ਼ੁਰੂ ਹੋ ਜਾਣੀ ਐ ਚੀਜ਼ ਬਦਲ ਗਈ ਹੁਣ ਹੁਣ ਖਤਰਾ ਵਿਸਲਦਾ ਕਾਟਾ ਚਲਾ ਗਿਆ ਸੰਸਾਰ ਦੀ ਲੋੜ ਨਹੀਂ ਕਹਿੰਦਾ ਹੁਣ ਮਾਇਆ माया ਵਿੱਚ ਜਾਣ ਦੀ ਲੋੜ ਨਹੀਂ ਸੋ ਕਿਉਂ ਬਿਸਰਾ ਕਿਉਂ ਬਿਸਰੂਗਾ ਹੁਣ ਇਹ ਤੇ ਹੁਣ ਬਿਸਰਨਾ ਕਾਹਨ ਦੱਸ ਬਸਾਂ ਦਾ ਲੜ ਹੱਥ ਆਇਆ ਇਹ ਲੜ ਛੱਡਣਾ ਕਿਉਂ ਹੁਣ ਉਹ ਜਿੰਨਾ ਤੇਰੀ ਇੱਕ ਸਕਿੰਟ ਦੀ ਵੀ ਜਿਹੜੀ ਕਮਾਈ ਆ ਉਹ ਤੇਰੀ ਬਦਲਵਾ ਦੁਨਾਈ ਨਹੀਂ ਕੀਤਾ ਜਿਹੜੀ ਤੇਰੀ ਕਾਲ ਕਮਾਈ ਆ ਐਨਿਕਾ ਵੀ ਚੱਲ ਛੱਡੋ ਇਹਦਾ ਦੋ ਬਿਸਕਟਾ ਦਾ ਤੇਰਾ ਜਿਹੜਾ ਸੀ ਕੀ ਦੇਣਾ ਇਹਦਾ ਕੁਝ ਐਦਾਂ ਨਹੀਂ ਗਿਆ ਉਹ ਉਦੋਂ ਦਾ ਤੂੰ 10 ਵਜੇ ਚਲਿਆ ਗਿਆ ਸੀ ਹਲਦੀਆੜੀ ਲਾ ਕੇ ਉਦੋਂ ਵੀ ਭੀ ਗਏ ਸੀ ਹਾਈਡੇਰੀ ਰੋਟੀ ਵੀ ਖਾ ਗਿਆ ਸੀ ਉਹ ਨਹੀਂ ਇਹ ਤਾਂ ਇੱਕ ਸਕਿੰਟ ਦੀ ਵੀ ਹਾਲ ਤੇਰੀ ਹੈ ਪੋੜੀ ਨਾ ਦੋ ਨੌਕਰੀ ਤੇ ਤੈ ਦੋ ਖਾਣਾ ਪੀਣਾ ਫਰੀ ਹੈ ਤੇ ਤਾਂ ਉਹ ਤਾਂ ਦੇਣਾ ਹੀ ਤੇ ਸੋ ਕਿਉਂ ਵਿਸਰਾਏ ਜੇ ਕੀਆ ਜਾਣੈ ਸੋ ਕਿਉਂ ਵਿਸਰਾਏ ਜੇ ਕੀਆ ਜਾਣੈ ਚੋ ਜੇ ਉਰਦੂ ਪਤਾ ਹੀ ਹੈ ਪਰ ਉਹ ਤੈਨੂੰ ਫੇਰ ਦੁਆੜ ਲਈ ਬੈਠਾ ਹੈ ਜਮਰਿਆ ਸੰਸੰਗ ਆਪਣੇ ਘਰ ਕਦੇ ਤੇ ਚੇਤਾਰਿਆ ਦੀ ਤੇਰਾ ਪਿਛਲਾ ਓਗੜ ਗੁਣ ਓਗੜ ਫਿਰ ਤੈਨੂੰ ਕਹ ਤੈਨੂੰ ਛੱਪ ਨਹੀਂ ਆਏਗਾ ਤੇ ਮਿਸਲਦਾ ਇਹ ਯਾ ਕੱਲ ਨਹੀਂ ਮਿਲਣਾ ਤੈਨੂੰ ਫੇਰ ਵੀ ਇਹਨੇ ਇਹਦੇ ਦਿਮਾਗ ਕਦੇ ਤੈ ਸੋਚਿਆ ਵੀ ਇਹਦੇ ਦਿਮਾਗ ਤੇ ਅਜੀ ਗੱਲ ਆਈ ਹੈ ਵੀ ਪਿੱਛੇ ਤੈ ਜੋ ਗਲਤੀਆਂ ਕੀਤੀਆਂ ਨੇ ਉਦੇ ਪ੍ਰਤੀ ਇਨਾ ਖੁਸ਼ ਹੈ ਹਾਲਾ ਹੈ ਜੋ ਤੱਕੀਤਾ ساری ਗਿਆਨ ਹੈ ਰੂ ਇਹਨੂੰ ਪਰੇਸ਼ਾਨਤਾ ਹੈ ਕੀਤਾ ਇਹਨੂੰ ਸਭ ਪਤਾ ਪਰ ਇਹ ਤਾਂ ਬਹੁਤ ਖੋਜਾ ਉਲਬੀਦਰ ਤੇ ਉਹ ਚਲੋ ਯਾਰ ਕਰਤੀ ਹੁੰਦੀ ਹੈ ਇਹਨੇ ਠੀਕ ਹੈ ਬਹੁਤ ਬਹਾਦਰ ਤਾਂ ਪ੍ਰਸ਼ੰਸਾ ਹੀ ਹੋ ਰਹੀ ਹੈ ਫੇਰ ਵੀ ਤੂੰ ਬਿਸਰੇ ਤੂੰ ਪਾਗਲੇ ਫਿਰ ਤੂੰ ਤੂੰ ਬਿਸਰਾਇ ਸੁਭਾਨ ਹੈ ਤੂੰ ਕਿਉਂ ਬਿਸਰਾਇ ਜਿਨੇ ਸਭ ਕੁਝ ਦਿਆ ਸੁਖ ਬਿਸਰਾਇ ਜਿਨੇ ਸਭ ਕੁਝ ਦਿਆ ਅਫਰੀਦਾ ਤੈਨੂੰ ਖਾਣਾ ਪੀਣਾ ਦਿੰਦਾ ਹੋਇਆ ਸ਼ਰੀਰ ਦੀ ਤੈਨੂੰ ਜੱਦਾ ਕੋਈ ਨਹੀਂ ਇਹਦਾ ਲੋਭ ਦਿੰਦਾ ਹੋਇਆ ਆਤਮਾ ਦੀ ਖਰਾਕ ਆਤਮਾ ਰੂਦਦੀ ਹੈ ਸ਼ਰੀਰ ਦੀ ਖਰਾਕ ਸ਼ਰੀਰ ਰੂਦਦੀ ਹੋਈ ਅਭੇਲਾ ਤੂੰ ਕਰਤਾ ਤੰਨ ਵਿਚੰਤਾ ਛੱਡ ਕੇ ਤੇ ਆਰਾਮ ਕਰ ਬੈਠ ਕੇ ਟੰਗ ਤੇ ਟੰਗ ਤੇ ਤਰਕੇ ਸੁਤਾ ਸੁਤਾ ਰਹਿ ਫੇਰ ਵਿਸਰਦਾ ਕੀ ਮਤਲਬ ਇਹ ਜਵਾਬ ਬਿਲਕੁਲ ਹੀ ਵਿਲੇ ਨੂੰ ਸਮਝਦੇ ਰਿਹਾ ਹੈ ਕੁਛ ਕੰਬੇ ਨਹੀਂ ਹੈ ਤੇਰੇ ਜੋ ਡਿਊਟੀਆਂ ਕੋਈ ਨੀ ਹੈ ਭੁਗਤੀਗੜਾ ਦੇ ਕੋਲ ਡਿਊਟੀ ਨਹੀਂ ਤੇ ਕੋਈ ਭੁਗਤੀਗੜਾ ਦੇ ਕੋਲ ਡਿਊਟੀ ਨਹੀਂ ਹੁੰਦੀ ਬੰਦਨ ਕਾਂ ਨਾ ਬਰਵਾ ਗਿਆ ਦੀ ਡਿਊਟੀ ਕੋਈ ਨਹੀਂ ਰੈਸ਼ਣ ਪੂਰਾ ਸੂਲ ਤਾਂ ਹਰਿਆਣਾ ਐ ਪੇਰੂ ਡਿਊਟੀ ਕੋਈ ਨਹੀਂ ਐ ਉੱਥੇ ਡਿਊਟੀ ਨਹੀਂ ਇੱਥੇ ਤਾਂ ਹੈਗੀਆਂ ਉੱਥੇ ਹੀ ਕੋਈ ਡਿਊਟੀ ਸੋ ਕਿਉਂ ਬਿਸਰਾਏ ਜੇ ਜੀਵਨ ਜੀਆ ਸੋ ਕਿਉਂ ਬਿਸਰਾਏ ਜੇ ਉਹ ਕਾਦੇ ਬਿਸਰਦਾ ਸਾਰੇ ਜੀਵਨ ਉਹਨੇ ਜਿਉਂ ਇਹਨੇ ਟਾਈਮ ਔਜ ਲਈ ਐ ਉਹ ਸਰੀਰ ਦਾ ਜੀਵਨ ਉਹਦੇ ਕਰਕੇ ਚੱਲਦਾ ਰਿਹਾ ਅੱਖਾਂ ਨਾਲ ਤਨ ਦਾ ਕੰਮ ਦੇਖਦਾ ਤੂੰ ਰਿਹਾ ਜਗਤ ਤਮਾਸ਼ਾ ਤੈਂ ਦੇਖਿਆ ਸਾਹ ਹੋ ਰਿਹਾ ਉਹਦੀ ਵਜ੍ਹਾ ਨਾਲ ਜੀਵਨ ਦੀ ਜੀਵਨ ਦਾ ਅਨੰਦ ਤੂੰ ਵਰਦਾ ਰਿਹਾ ਤੇ ਉਹ ਉਹਨੂੰ ਕਦੇ ਸੋ ਕਿਉਂ ਵਿਸਰਿਆ ਅਗਨੀ ਮਹਿ ਰੱਖਾ ਸੋ ਕਿਉਂ ਵਿਸਰਿਆ ਜਗਤ ਨੂੰ ਮਹਿ ਰੱਖਾ ਤੈਨੂੰ ਗਰਬ ਦੇ ਵਿਚ ਕਰਨ ਤੇ ਨਹੀਂ ਰੱਖਦਾ ਰਿਹਾ ਉਹਨੂੰ ਕਿਉਂ ਵਿਸਰਨਾ ਹੁਣ ਵੀ ਰੱਖ ਰਿਹਾ ਵਾਕੀਆਂ ਨੂੰ ਆ ਦੇਖੋ ਫਿਰ ਕਰਬਲਾ ਦਾ ਸ਼ੁਨਗਾਇਦੇ ਉਹਨੇ ਵਿਚ ਰੱਖਿਆ ਨੋ ਜੀ ਨੇ ਤੂੰ ਉਹਨੂੰ ਬਸਲਿਆ ਐਡੀ ਬੜੀ ਸ਼ਕਤੀਸ਼ਾਲੀ ਨੂੰ ਐਡੀ ਬੜੀ ਕਲਾ ਨੂੰ ਐਡੀ ਬੜੀ ਕਰਾਮਾਤ ਨੂੰ ਕਿਸਰ ਹੈ ਤਪਾਗਲ ਹੈ ਕਾਦੇ ਵਾਤੇ ਬਸਲਿਆ ਇਦੋਂ ਕੋਈ ਬੜੀ ਸ਼ਕਤੀ ਹੈ ਬੜੀ ਸ਼ਕਤੀ ਨਹੀਂ ਹੈ ਕੋਈ ਫਿਰ ਸਭ ਤੋਂ ਬੜੀ ਸ਼ਕਤੀ ਨੂੰ ਬਿਛੜੀ ਜਾਂਦੀ ਹੁੰਦਾ ਤਿਆਗੀ ਤਾਂ ਨਹੀਂ ਹੁੰਦਾ ਬਣੀ ਗੁਰਪ੍ਰਸਾਦ ਕੋ ਬਿਰਲਾ ਲਖ ਹੈ ਗੁਰਪ੍ਰਸਾਦ ਕੋ ਬਿਰਲਾ ਲਖ ਹੈ ਕਹਣਾ ਗਿਆਨ ਦੀ ਕਿਰਪਾ ਹੋਵੇ ਗੁਰਪ੍ਰਸਾਦ ਮਿਲੇ ਇਹ ਜਿਹੜੀ ਅਸੀਂ ਗੱਲ ਪਿੱਛੇ ਕਹਿਤੀ ਇਹ ਕੋ ਬਿਰਲਾ ਇਹ ਦਰਸ਼ਨ ਕਰੇ ਜੋ ਕਹਤੀ ਨਾ ਕਾਨਾ ਪਾਨ ਜੋ ਕੋ ਵਸਰੇ ਜੋ ਕੋ ਵਸਰੇ ਜੋ ਕੀਆ ਜਾਣ ਸੋ ਕੋ ਵਸਰੇ ਜੋਗਨ ਮੇਰਾ ਕਾ ਇਹ ਤਾਂ ਕੋਈ ਬਿਰਲਾ ਇਹ ਗੱਲ ਨੂੰ ਦਰਸ਼ਨ ਕਰ ਸਮਝੂਗਾ ਪੜ ਲੈਣਗੇ ਲੋਕ ਸਮਝ ਨਹੀਂ ਆਉਣੀ ਗੱਲ ਕੀ ਹੈ ਦੇਖਣੀ ਹੋਣਾ ਕਿ ਇਹਨੂੰ ਕਿਦੇ ਵਾਸਤੇ ਕਿਹਾ ਹੋਇਆ ਹੈ है ਕਿਹਾ ਹੋਇਆ ਹੈ ਅਗਰ ਤੇ ਰੱਖਣ ਵਾਲਾ ਕੌਣ ਹੈ ਉਹਦਾ ਦਰਸ਼ਨ ਨਹੀਂ ਕਰਨਾ ਤੂੰ ਦੇਖਣਾ ਨਹੀਂ ਅਗਰ ਤੇ ਰੱਖਣ ਵਾਲਾ ਕੌਣ ਹੈ ਇਹ ਕੋ ਜਿ ਵਿਖਤੇ ਕੱਢ ਸੁਖ ਬਿਸਾ ਜਿ ਵਿਖਤੇ ਕੱਢ ਅਬੇ ਖਮਾਇਆ ਬਿਖੇ ਇਹ ਜੋ ਕੱਢ ਲਿਆ ਜਨਮ ਜਨਮ ਦਾ ਟੂਟਾ ਘੰਡਾ ਹੈ ਜਨਮ ਜਨਮ ਦਾ ਕਿੰਨੇ ਜਨਮਾਂ ਤੋਂ ਛੁੱਟਿਆ ਹੋਇਆ ਟੁੱਟਿਆ ਹੋਇਆ ਤੇ ਫੇਰ ਕੱਢ ਲਿਆ ਨਾਲ ਜਨਮ ਜਨਮ ਦਾ ਟੂਟਾ ਘੰਡਾ ਜਨਮ ਜਨਮ ਦਾ ਟੁੱਟੇ ਇਹ ਦੂ ਵਿਛੜੇ ਦੂ ਬਲਾ ਲਿਆ ਹੁਣ ਨਾ ਬੇ ਜੀ ਹਾਂ ਗੁਰੂ ਪੁਰਾ ਤਤ ਇਹ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਾਣਦਿਆ ਗੁਰ ਪੂਰੇ ਤਤ ਇਹ ਬੁਝਾਇਆ ਜਦ ਪੂਰੇ ਸਤਗੁਰ ਨੇ ਇਹ ਸਾਰਾ ਤਤ ਸੁਭਝਾਇਆ ਬੁਝਾਇਆ ਤਾਂ ਜਾ ਕੇ ਕਿਤੇ ਸਿੱਖ ਦੇ ਮਾਨ ਦੇ ਜਾਣਦਿਆ ਤਾਂ ਕਿਤੇ ਸਿੱਖ ਨੇ ਗੁਰ ਸਿੱਖਣੇ ਜਾ ਕੇ ਜਾਣੇ ਆਪਣੇ ਪ੍ਰਭ ਦੇ ਵਿੱਚ ਧਿਆਨ ਜੋੜਿਆ ਐਵੇਂ ਦੀ ਜੁੜਦਾ ਧਿਆਨ ਆਪਣਾ ਨਾਨਕ ਜਾਣਦਿਆ ਜਿਨ੍ਹਾਂ ਨੇ ਧਿਆਇਆ ਤਾਂ ਧਿਆਇਆ ਜਦ ਪੂਰੇ ਸਤਗੁਰ ਨੇ ਉਹਨਾਂ ਦੇ ਖਾਣੇ 'ਚ ਗੱਲ ਬਿਠਾ ਲਤੀ ਤਾਂ ਪਟਕੇ ਧਿਆਨੇ ਦਰ ਉਧਰ ਲੱਗਿਆ ਗੁਰ ਬੁਝ ਲਿਆ ਜਦ ਪੂਰੇ ਸਤਗੁਰ ਨੇ ਇਹ ਤਤ ਸਾਰ ਸੰਸਾਰ ਦਾ ਖਾਣੇ 'ਚ ਬਿਠਾ ਤਾਂ ਕਿਤੇ ਜਾ ਕੇ ਸੰਸਾਰ ਛੱਡ ਕੇ ਉਹ ਸਤਗੁਰ ਸਰਗੋਫਰਨਾ ਨਾਨਕ ਜਨਤ ਦੇ ਪ੍ਰਭ ਦੇ ਆਪਣੇ ਬੋਰਡ ਨਾਲ ਜੁੜਿਆ ਹੈ ਐਵੇਂ ਨਹੀਂ ਜੁੜ ਜਾਂਦਾ